ਗੁਰ ਪੂਰਾ ਜਿਨ ਸਿਮਰਿਆ ਸਈ ਪਏ ਨਿਹਾਲ ਨਾਨਕ ਨਾਮ ਅਰਾਧਨਾ ਕਾਰਜ ਆਵੇ ਰਾਸ ਜਿਹਦਾ ਮੇਹ ਦੇਦਾਰੀ ਸੋ ਲੈ ਪੂਰਾ ਨਹੀਂ ਹੁੰਦਾ ਦੇਦਾਰੀ ਪੂਰਾ ਹੋਵੇ ਜਿਹੜਾ ਮਾਇਆ ਵਿੱਚ ਉਦਾਸੀ ਹੋਵੇ ਸੇਚ ਰਹਿਣਾ ਹੋਇਆ ਆਮੀ ਰਹਿਣਾ ਨਾਲ ਜੁੜਿਆ ਹੋਇਆ ਹੋਵੇ ਮੇਰਾ ਆਕਾਲ ਦੀ ਸੋਝੀ ਕਰਾਵੇ ਮੇਰਾ ਆਕਾਲ ਦੀ ਜਾਣਕਾਰੀ ਰੱਖਦਾ ਹੋਵੇ ਆਤਮਦਰਸ਼ੀ ਹੋਵੇ ਆਤਮ ਗਿਆਨੀ ਹੋਵੇ ਆਤਮ ਕੇ ਅਧੀ ਹੋਵੇ ਉਹ ਪੂਰਾ ਹੋ ਰ। ਜੇ ਕਾਲ ਦੀ ਗੱਲ ਕਰਦਾ ਹੋਵੇ ਹੁਕਮ ਨਾਲ ਜੁੜਿਆ ਹੋਇਆ ਹੋਵੇ ਸਾਪ ਦੀ ਵਿਆਖਿਆ ਕਰਦਾ ਹੋਵੇ ਉਹ ਪੂਰਾ ਕੋਈ ਨਿਆਲ ਹੋਏ ਜਿਨ੍ਹਾਂ ਨੇ ਉਹ ਸਮਰਿਆ। ਪੂਰੇ ਗੁਰੂ ਦਾ ਉਪਦੇਸ਼ ਹੈ ਗੁਰਬਾਣੀ। ਜਿਨ੍ਹਾਂ ਨੇ ਇਹ ਜਪ ਲਈ ਸਮਝ ਲਈ ਉਹਨਾਂ ਨੇ ਪੂਰਾ ਗੁਰ ਸਮਝ ਲਿਆ। <table><tr><td>ਨਾਕ ਨਾਮ ਰੱਦਵਾ ਕਾਲ ਆਵੇ ਰਾਤ ਜਿਹੜੇ ਪੂਰਾ ਘਰ ਸਫਲ ਲੈਣ ਦਾ ਹੈ ਉਹ ਹੀ ਨਾਮ ਦੇ ਅਰਾਧਨਾ ਕਰਦਾ ਨੇ ਉਹ ਨਾਮ ਨੂੰ ਗਦੇ ਨੇ। ਮਨ ਦੀ ਧੁੱਖ ਕੀ ਹੁੰਦੀ ਹੈ ਕਾਰਜ ਆਵੇ ਰਾਤ। ਨਾਮ ਦੀ ਅਰਾਧਨਾ ਕਰਦੇ ਨੇ ਤਾਂ ਕਿ ਸਾਰੇ ਕਾਰਜੇ ਰਾਤ ਹੋ ਜੇ। ਚਾਰੇ ਪਦਾਰਥ ਮਰਜਣ। ਜਦੋਂ ਪਦਾਰਥ ਮਰ ਲੰਨ ਕਾਰਜ ਦਾ ਸੋਣਾ ਉਹ ਤੋਂ ਪਹਿਲਾਂ ਕਾਰਜ ਦਾ ਹੈ। ਚੌਥਾ ਪਦਾਰਥ ਆ ਜਿਹੜਾ ਪਦਾਰਥ ਜਦ ਚਾਰੋਂ ਪਦਾਰਥ ਮਿਲ ਗਿਆ ਕਾਰਜਾਤ ਹੋ ਗਿਆ। ਜੋ ਪਦਾਰਥਾਂ ਨਾਲ ਮੁਕਤੀ ਦਾ ਕਾਰਜਾਤ ਨਹੀਂ ਹੈਗਾ। ਪਰ ਬਾਕੀ ਧਰਮਾਂ ਦੀ ਗੱਲ ਇਹ ਦੀ ਖਾਸ ਕਰਕੇ ਮੁਕਤੀ ਦਾ ਗੱਲ ਹੈ। ਇਸ ਕਰਕੇ ਬੁੱਤਪਤੀ ਦੀ ਗੈਦੀ ਪਿਆਦਾ ਉਹਦਾ ਜੋ ਅਗਜੇ ਹੈ ਕਾਰਜਾਤ ਦੀਆਂ ਮੁਕਤੀ ਵਾਲਿਆਂ ਦਾ। ਆਮਰੇ ਨਾਲ ਕਾਰਜਾਤ ਹੈ ਕੋਈ ਤਾਂ ਉੱਗਵੇ। ਇਹ ਕਾਰਜਾਤ ਹੈ। ਠੀਕ ਹੈ ਜੀ ਗੁਰਪੁਰਾ ਜਿਵੇਂ ਕਹੀਏ ਸਤਗੁਰ ਹੈ ਤੇ ਜੇ ਸਤਗੁਰ ਸਿਮਰ ਲਿਆ ਤਾਂ ਇੱਕ ਹੋ ਗਿਆ ਹੈ ਜੀ ਠੀਕ ਹੈ ਹੁਣ ਜਿਹੜਾ ਉੱਗਣਾ ਇਹਦੇ ਵਾਸਤੇ ਅਰਾਧਣਾ ਪੈਣਾ ਨਾਨਕ ਨਾਮ ਅਰਾਧਣਾ ਹੈ ਜੀ ਅਰਾਧਣਾ ਬਣਾਉਗਦਾ ਠੀਕ ਹੈ ਖਾਸ ਕਰਕੇ ਇਹ ਜਿਹੜਾ ਅਰਾਧਨਾ ਖਰ ਪਾਇਆ ਹੈਗਾ ਇਹ ਜਿਹੜੇ ਦੋ ਪਦਾਰਥਾਂ ਤੋਂ ਬਾਅਦ ਚਾਰ ਪਦਾਰਥ ਪ੍ਰਾਪਤ ਕਰਨੇ ਆ ਉਹਦੇ ਵਾਸਤੇ ਜਿਹੜੀ ਅਰਦਾਸ ਹੈ ਅਰਾਧਨਾ ਹੈ ਜੀ ਠੀਕ ਹੈ ਜੀ इथे 8 आथ वे श्लोक री समाप्ति है जी